ਤਦ ਧਰਮ ਧਰੇ ਧਰਮਾ ਗੁਣਕਾਰੀ ਮੰਤੀਰਾ ਤਦੈ ਧੂਲ ਪੜੈ ਮੁਖ ਮਸਤਕ ਕੰਚਨ ਭਏ ਮਨੂਰਾ ਤਦ ਤਦਮੁ ਪਰੈ ਗੁਣਕਾਰੀ ਬਸਤੀਰਾ ਪ੍ਰਣਾਤਾ ਬੜੂ ਅਪੇ ਗੁਣਕਾਰੀ ਸਦਾ ਕਰਬਤੜੇ ਧਰਮਾਪੁਰ ਹਾਂਜੀ ਕਿੱਥੇ ਕਰੇ ਧਰਮਾਪੁਰ ਹਿਰਦੇ ਜਿ ਰੱਖੇ ਜਿੱਥੇ ਧਰਮਾਜ ਬੈਠਾ ਧਰਮਾਪੁਰ ਤੇ ਅੰਨ ਕਰੇ ਬਾਹਰ ਵਾਲੇ ਕੇ ਇਤੇ ਕਪੜੀ ਦੇ ਬਦਲਵੇ ਹੂੰ ਹੂੰ ਕਰੇ ਕਰਬਲੂ ਅੱਛਾ ਜੀ ਜੇ ਬਾਹਰ ਲੈ ਲੈ ਧਰਮਾਪੁਰ ਦੀਵੇਂ ਅੱਛਾ ਜੇ ਬੰਦ ਪੀ ਲਿਆ ਨਾ ਪੰਜ ਚੂੜੇ ਫੇੜ ਕੇ ਰਹਿ ਗਏ ਧਰਮਤਾਲ ਨਹੀਂ ਹੋਇਆ। ਅੱਛਾ ਜੀ। ਜੇ ਧਿੱਲੀ ਨਹੀਂ ਆਈ ਬਲ ਕੇ ਧਰਮਤਾਲ ਨਹੀਂ ਹੋਇਆ। ਗੁਣਕਾਰੀ ਬੰਤੀ ਰਾ ਗੁਣਕਾਰੀ ਬੰਜੀ ਉਹ ਜੋ ਗੁਣਕਾਰੀ ਹੁੰਦਾ ਚੱਲਿਆ ਜਾਉ ਉਹਨਾਂ ਹੀ ਗੁਣਤੀ ਰਿਵਾਜ ਹੁੰਦਾ ਚੱਲੇ ਇਕਦਾ ਚੱਲਿਆ ਜਾਉ। ਛਾਂਦੀ ਨੂੰ ਕੌਣ ਕਾਲੀ ਹੁੰਦੀ ਹੈ ਜੀ ਤੇ ਜੀ ਹੋਈ ਜਾਂਦੀ ਦਿਗੀ ਜਾਂਦੀ ਜਿੰਨਾ ਤਾ ਉਹ ਕਹੋਈ ਜਾਂਦਾ ਠੀਕ ਹੈ ਜੀ ਅੱਡਾ ਤੂੜ ਫਰੇ ਮੁਖ ਮਸਤ ਕਰ ਪੈਂਦੀ ਆ ਮੁਖ ਮਸਤ ਜੇ ਸੱਟ ਜੇ ਗਿਆਨ ਦੀ ਦੂੜ ਪੈਂਦੀ ਰਹੇ ਇਸ ਗਿਆ ਲੈਦਾ ਰਹੇ ਗੁਰੂ ਦੇ ਕਲਚਨ ਪਾਇ ਬਜ਼ੂਰ ਆਪੂਰ ਵੀ ਕਲਚਨ ਵਜੂਗਾ ਗੁਰੂ ਰਸਲੇ ਗਲੇ ਹਨ ਲੋਹੇ ਨੂੰ ਕਹਿੰਦੇ ਅੱਛਾ ਜੀ ਯਾਰ ਹੋ ਜਲਦੀ ਹੈ ਲੋੜ ਨਹੀਂ ਕੋਲ ਸ਼ਬਦ ਸੁਣਦਾ ਰਹੇ ਬਜ਼ੂਰ ਵੀ ਕਲਚਨ ਵਜੂਗਾ ਠੀਕ ਕਹਿ ਜੀ ਵੀ ਅਸਾਉ ਮਿੱਠੀ ਕੋ ਜੂਗੀ ठीक है जी तन तरणी तर आप अजोनी टोल बोल सच पूरा करते तळी तर करता जाना कह जाण नर सुरुरा तांडित अरळी तर, सारी तळी तांड तर्न की हुई है ਇਹਦੇ ਸਾਰੀ ਤਫ਼ਸੀਲ ਉਹ ਅਸਰਾ ਦਿੱਤਾ ਹੋਇਆ ਹੈ ਉਹ ਤੰਤ ਉਹ ਤੰਤ ਯੋਗ ਆਪ ਅਜੋਲੀ ਦੇ ਸਰੀਰ ਵਿੱਚ ਕੋਈ ਨਹੀਂ ਤਾਂ ਵੀ ਸਾਹ ਦਾ ਖੜਾ ਹੈ ਬੋਲ ਸੱਚ ਪੂਰਾ ਥੋੜ ਕੇ ਬੋਲਦਾ ਹੈ ਇੱਕ ਵਲ ਬੋਲਰ ਬੋਲ ਸੱਚ ਪੂਰਾ ਸੱਚ ਬੋਲੋ ਬੋਲੋ ਵਿਚਾਰ ਲਓ ਬੋਲ ਨੂੰ ਕਿ ਤੋਂ ਵੀ ਸਮੀਧੀ ਨਿਕਲੂ ਸਾਚਿਤ ਕਰੂਗਾ ਤੋਲ ਬੋਲਦਾ ਕੀ ਮਿੱਟੀ ਕਰਤੇ ਦਾ ਕਰਤੇ ਦੇ ਗੁਰੂ ਵਿੱਚ ਕੀ ਹੈ ਇਹ ਤਾਂ ਕਰਤਾ ਹੀ ਜਾਣਦਾ ਜਾਂ ਫਿਰ ਕੋਈ ਗੋਸੂਰਾ ਜਾਣਦਾ ਈ ਤੋਂ ਜਣਾ ਦੇਵੇ ਜਿਸ ਨੂੰ ਤੂੰ ਜਾਣਦਾ ਐ ਸੋਈ ਜਨ ਦੇ ਨੇ ਠੀਕ ਹੈ ਕਰਤੇ ਤੋਂ ਭਾ ਪਰਮੇਸ਼ਰ ਹੋ ਗਿਆ ਜੀ ਹਾਂ ਠੀਕ ਹੈ ਰੀਆ ਜਾਣਦਾ ਆਸ ਜੀ ਨੂੰ ਜਣਾ ਦੇਵੇ ਗੁਰ ਨੂੰ ਕੋ ਨੂੰ ਜਣਾ ਦੇਵੇ ਠੀਕ ਹੈ ਜੀ ਉਹ ਜਾਣਦਾ ਕਰਤਾ ਗੁਰੂ ਐ ਤੇ ਜਾਣਦਾ ਜਿਹਨੂੰ ਉਹ ਜਣਾਉਂਦਾ ਉਹ ਗੁਰ ਹੈ ਗੁਰਦੇਵ ਠੀਕ ਹੈ ਜੀ ਇਸ ਜਿਹੜੀ ਪੰਕਤੀ ਹੈ ਦੇ ਬਾਰੇ ਇੱਕ ਦੋ ਪ੍ਰਚਲਿਤ ਕਹਾਣੀਆਂ ਵੀ की ਜੀ ਕਿ ਪਾਠ ਕਰਦੇ ਸਮੇਂ ਜੇ ਆਪਾਂ ਇੱਕ ਗਲਤੀ ਕਰ ਜਾਈਏ ਮਾਤਰਾ ਦੀ ਕਿ ਜੇ ਆਪਾਂ ਕਰਤੇ ਕੀ ਮਿਤ ਕਰਤਾ ਜਾਣੇ ਕੇ ਪੜ ਜੀ ਕੇ ਜਾਣੇ ਗੁਰੂ ਸੂਰਾ ਫਿਰ ਅਰਥ ਬਿਲਕੁਲ ਉਲਟ ਹੋ ਜਾਂਦੇ ਹੈ ਪਰ ਉਹ ਸੁਣਾਦਾ ਸਭ ਕੁਝ ਨਹੀਂ ਹੈ ਦਾ ਪਤਾ ਹੀ ਹੈ ਪਰ ਉਹ ਕਹਿੰਦੇ ਨਾ ਰਕੇ ਸਕਦਾ ਠੀਕ ਹੈ ਜੀ ਪਰ ਉਹ ਜਿਹੜੇ ਆਪਣਾ ਪਾਠ ਸ਼ੁੱਧ ਦੀ ਗੱਲ ਦਲੀਲ ਦਿੰਦੇ ਉਹ ਕਹਿੰਦੇ ਆ ਕਿ ਹਰੇਕ ਲਾਂਦਨਾ ਨੂੰ ਉਸ ਤਰ੍ਹਾਂ ਹੀ ਸੋਚ ਕੇ ਪੜ੍ਹਨਾ ਚਾਹੀਦਾ ਜਿਵੇਂ ਲਿਖੀ ਹੈ ਬਾਣੀ ਕੋਈ ਹੈ ਕਹਾਣੀ ਦਸਮ ਪਾਤਸ਼ਾਹ ਦੇ ਸਮੇਂ ਕੋ ਗੱਲ ਹੋਈ ਸੀ ਉਹਦੇ ਨਾਲ ਇਹਨੂੰ ਸੰਜੋੜਦੇ ਹਾਂਜੀ ਹਾਂਜੀ